પરમ સત્કાર્યયોગ સાత్సંગિતજીઓ apni apni rasna pavitra karn vaste man chitt virti nu ekaghar karn vaste akho tan sri satguru ram singh satche patshaa ida mahatm likhya kise kavi ne mahatma kehende ne ram singh naam le tarasna pavitra bhai ਰਾਮ ਸਿੰਘ ਨਾਮ ਲੇ ਤੇਰੇ ਦਾ ਹਰ ਖਾਇਓ ਹੈ। ਰਾਮ ਸਿੰਘ ਨਾਮ ਲੇ ਜਨ ਕੋ ਪ੍ਰਤਗਿਆ ਆਈ ਬੇਦਿਓ ਪ੍ਰਾਨ ਤਤ ਹਿਰਦੈ ਵਸਾਇਓ ਹੈ। ਰਾਮ ਸਿੰਘ ਨਾਮ ਲੇ ਜਮ ਨਾ ਦਿਖਾਈ ਦੇਤ। ਰਿਦਾ ਸ਼ੁੱਧ ਹੋਏ ਭੂਤ ਪਬ ਦ੍ਰਿਸ਼ਟਾਇਓ ਹੈ। ਰਾਮ ਸਿੰਘ ਨਾਮ ਲੇ ਤੀਨ ਲੋਕ ਪਾਰ ਭੈ ਕਰੋ ਨਮਸਕਾਰ ਜਨ ਰਾਮ ਸਿੰਘ ਤੇ ਆਇਓ ਹੈ। ਫੇਰਾਖੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਆਪਨੇ 71 ਹੋ ਕੇ ਇੱਥੇ ਸਾਜ ਸੰਗਤ ਨੇ ਨਾਮ ਸਿਮਰਨ ਕੀਤਾ ਏ ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨ ਕੀਤੇ ਨੇ ਹੁਣ ਮੈਨੂੰ ਹੁਕਮ ਹੋਇਆ ਕੁਝ ਅਰਜਾ ਕਰਨ ਵਾਸਤੇ ਮੈਂ ਬੇਨਤੀਆਂ ਕਰਨੀਆਂ ਨੇ ਸਤਿਗੁਰਾਂ ਨੇ ਗੁਰਬਾਣੀ ਅੰਦਰ ਸਾਨੂੰ ਮਨੁੱਖ ਨੂੰ ਸਮਝਾਉਣ ਵਾਸਤੇ ਅਨੇਕ ਯਤਨ ਕੀਤੇ ਨੇ ਉਹਦੇ ਵਿੱਚ ਭਗਤੀ ਮਾਰਗ ਤੇ ਚੱਲਣ ਵਾਲੇ ਲੋਕ ਨੇ ਜੋ ਉਹਨਾਂ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਈਸ਼ਵਰ ਦੇ ਨੇੜੇ ਹੋਣਾ ਪਰਮੇਸ਼ਰ ਦੇ ਨੇੜੇ ਹੋਣਾ ਚਾਹੁੰਦਾ ਕੋਈ ਤੇ ਉਹਦਾ ਸਭ ਤੋਂ ਵੱਡਾ ਸਾਧਨ ਹੈ ਗੁਰੂ ਤੇ ਸਤਿਗੁਰੂ ਤੇ ਪ੍ਰਤੀਤ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਅੰਦਰ ਬਹੁਤ ਸੁੰਦਰ ਇੱਕ ਸ਼ਬਦ ਲਿਖਿਆ ਜਿਹੜਾ ਕਿ ਸਾਡੇ ਬਹੁਤ ਹੀ ਕੰਮ ਆਉਂਦਾ ਗੁਰਸਿੱਖ ਦੇ ਕੰਮ ਆਉਣ ਵਾਲਾ ਪਾਤਸ਼ਾਹ ਕਹਿੰਦੇ ਨੇ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਅਰਜਮਾ ਕਰਨੀ ਹੈ ਸਤਗੁਰੂ ਤੇ ਪ੍ਰਤੀਤ ਪਰਮੇਸ਼ਰ ਦੇ ਨੇੜੇ ਹੋਣ ਦਾ ਸਭ ਤੋਂ ਵੱਡਾ ਸਾਧਨ ਹੈ ਜਿੰਨੇ ਵੀ ਪਕਤੀ ਮਾਰਗ ਤੇ ਚੱਲਣ ਵਾਲੀਆਂ ਸ਼੍ਰੇਣੀਆਂ ਨੇ ਇਹਨਾਂ ਸਾਰਿਆਂ ਵਾਸਤੇ ਜੇ ਗੁਰੂ ਤੇ ਪ੍ਰਤੀਤ ਨਾ ਹੋਵੇ ਗੁਰੂ ਚਰਨਾਂ ਨਾਲ ਪ੍ਰੀਤ ਨਹੀਂ ਤੇ ਸਤਿਗੁਰੂ ਤੇ ਪ੍ਰਤੀਤ ਨਹੀਂ ਬਣੀ ਤੇ ਧਿਆਨ ਰੱਖਣਾ ਫਿਰ ਜਿੰਨੇ ਜੀ ਕਰੇ ਕੋਈ ਕਰਮ ਕਰਦਾ ਫਿਰ ਇਹ ਕਰਮ ਸਫਲ ਨਹੀਂ ਹੁੰਦਾ ਸਤਿਗੁਰੂ ਤੇ ਪ੍ਰਤੀਤ ਵਾਲਿਆਂ ਦੇ ਕਰਮ ਸਫਲ ਹੋ ਜਾਂਦੇ ਨੇ ਜੇ ਬਿਨਾ ਪ੍ਰਤੀਤ ਤੋਂ ਕਰਮ ਕੀਤਾ ਜਾਂਦਾ ਤੇ ਉਹ ਕਰਮ ਸਫਲ ਨਹੀਂ ਹੋਇਆ ਸਹਿਬਾ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ ਪਾਤਸ਼ਾਹ ਕਹਿੰਦੇ ਨੇ ਜਿਸਨੂੰ ਪ੍ਰਤੀਤ ਹੋਵੇ ਕਾ ਗਾਵਿਆ ਥਾਏ ਪਵੈ ਸੋ ਪਾਵੈ ਦਰਗਾ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ-ਕੂੜੀ ਅੱਖੀ ਮੀਟ ਦੇ उनका उत्तर जाएगा छूट गुमान बिना प्रतीत तो कर रहे ਨਾ ਪਰ ਕੀਰਤਨ कीर्तन करना कथा करनी बड़ा ही ਕਰਮ कर्म है पर जकते जिस दी कथा करनी है ओदे ऊपर प्रतीत ही नहीं बनी जिस दा कीर्तन करना है ओदे ऊपर प्रतीत नहीं ते फिर निरा दिखावा बन के रह जाएगा सब कुछ दिखावा हो ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਜੋ ਬਿਨ ਪ੍ਰਤੀਤੀ ਅੰਦਰ ਕਪਟ ਹੈ ਕੂੜੀ-ਕੂੜੀ ਅੱਖੀ ਮੀਟਦੇ ਉਹਨਾਂ ਕਾ ਉੱਤਰ ਜਾਏਗਾ ਝੂਠਗੁਮਾਨ ਕਿਉਂਕਿ ਬਿਨ ਬਿਨਾ ਪ੍ਰਤੀਤ ਤੋਂ ਕੀਰਤਨ ਕਰਦਾ ਪਿਆ ਇਸ ਵਾਸਤੇ ਕਈ ਲੋਕ ਕਥਾ ਵੀ ਕਰਦੇ ਨੇ ਬੜੇ-ਬੜੇ ਕਥਾਕਾਰ ਤੁਰੇ ਫਿਰਦੇ ਨੇ ਦੁਨੀਆਂ ਵਿੱਚ ਔਰ ਉਹ ਸਾਂਝੀ ਵਾਲਤਾ ਦੀਆਂ ਗੱਲਾਂ ਵੀ ਬਹੁਤ ਕਰਦੇ ਨੇ बड़े-बड़े अच्छे प्रमाण ਹੁੰਦੇ ਨੇ ਉਹਨਾਂ ਕੋਲ ਸਾਰੀਆਂ ਸ਼੍ਰੇਣੀਆਂ ਦੇ ਪ੍ਰਮਾਣ ਦੇ ਦੇ ਕੇ ਆਪਣੀ ਕਥਾ ਨੂੰ ਮਜ਼ਬੂਤ ਕਰਦੇ ਨੇ ਪ੍ਰਭਾਵ ਵੀ ਹੈ ਪਰ ਉਹਦੇ ਵਿੱਚ ਵੀ ਇੱਕ ਰਾਜ ਹੈ ਨਾ ਪਾਤਸ਼ਾਹ ਕਹਿੰਦੇ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਬਹੁਤ ਕਥਾਕਾਰ ਫਿਰਦੇ ਨੇ ਦੁਨੀਆ 'ਚ ਪਰਥਾਏ ਸਾਖੀ ਮਹਾਪੁਰਖ ਬੋਲਦੇ ਸੰਜੀ ਸਗਲ ਤੇ کئی ਇਸ ਪੱਖੋਂ ਵੀ ਇਸ ਤਰ੍ਹਾਂ ਕਰਦੇ ਨੇ